ਸ਼ਲੋਕ ਮਹੱਲਾ तीज़ा, ਜਿੰਨਾ ਗੁਰ ਨਹੀਂ ਭੇਟਿਆ ਕਹਿ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨ ਚੁੱਕੇ ਚਿੰਦ ਹਾਂ ਜਿੰਨਾ ਗੁਰਨਾ ਭੇਟਿਆ ਜਿੰਨਾਂ ਨੇ ਆਪਣਾ ਅੰਗੂਲੇ ਨ ਭੇਟਿਆ ਆਪਣਾ ਗੁਰਦੇ ਮਾਤਾ ਗੁਰਦੇ ਪਿਤਾ ਵੀ ਭੇਟਿਆ ਆਪਣੇ ਅੰਦਰ ਆਤਮਾਨਾ ਜਿੰਨਾਂ ਦਾ ਵਿਲਾਪ ਨਹੀਂ ਹੋਇਆ ਤਾਗੀ ਨਹੀਂ ਬੰਦ ਉਹਨਾਂ ਦੇ ਅੰਦਰ ਰਤੀ ਪਰ ਵੀ ਪਹਿਰੀ ਉਹ ਅਨੇ ਹੋ ਕੇ ਕੰਮ ਕਰਦੇ ਨੇ ਸੰਸਾਰ ਚ ਉਹ ਹਿੰਦੂ ਅਨਾਹਾਂ ਹੀ ਕੇ ਹੈ ਉਹੀ ਅਨਾਹ ਤਾਗੀ ਨਹੀਂ ਬੰਦ ਰਤੀ ਪਰ ਵੀ ਪਹਿਰੀ ਉਹਨਾਂ ਦੇ ਵਿੱਚ ਉਹ ਹੰਡਾ ਵਿਰੋਧ ਕਰਦੇ ਨੇ ਉਹ ਹੋ ਕੇ ਹਾਂਜੀ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਇਸ ਕਰਕੇ ਉਹਨਾਂ ਨੂੰ ਆਉਣ ਜਾਣ ਦਾ ਦੁੱਖ ਵੱਡਾ ਦੁੱਖ ਲੱਗਿਆ ਰਹਿੰਦਾ ਜਿੰਤਾ ਕਦੇ ਵੀ ਦੀ ਖਤਮ ਨਹੀਂ ਹੋ ਸਕਦੀ। ਹੋਇਆ ਕਰਦੀ। ਹਾਂਜੀ। ਕੱਪੜ ਜਿਵੇਂ ਪਛੋੜੀ ਐ। ਘੜੀ ਮੋਤ ਘੜੀ ਹਾਲ। ਨਾਨਕ ਸੱਚੇ ਨਾਮ ਬਿਨ ਸਿਰੋਂ ਨ ਚੁੱਕੈ ਜੰਜਾਲ। ਕੱਪੜੇ ਨੂੰ ਫਸਾਬਣ ਲਾ ਕੇ ਆ ਕੁਛ ਹੋਰ ਛੱਡਦੇ ਆਂ। ਕੱਪੜੇ ਨੂੰ ਛੱਡਿਆ ਤੇ ਮੈਂ ਉਹਦੀ ਮਲਣੀ ਨਹੀਂ ਕਰਦੀਆਂ ਧੋਬੀ फडका-फडका ਮਾਰਦਾ ਕੱਪੜੇ ਨੂੰ ਥੋੜੀ ਵੇਰ ਵਾਸਤੇ ਮਾਰਦਾ ਜਾਂ ਮਾਲ ਕੱਟਣ ਵਾਸਤੇ ਮਾਲਦਾ ਕੱਪੜੇ ਨੂੰ ਪਾਉਣ ਵਾਸਤੇ ਨਹੀਂ ਮਾਰਦਾ ਕਾਗਪੜ ਜਿਵੇਂ ਪਿਛੋੜੀ ਐ ਕੜੀ ਮੋਤ ਘੜਿਆਲ ਥੋੜੇ ਦੇਰ ਵਾਸਤੇ ਸੇ ਘੜਿਆਲ ਨੂੰ ਜਿੰਨੀ ਲੋਡ ਹੁੰਦੀ ਐ ਤਾਂ ਘੜਿਆਲ ਤੇ ਡਗਾ ਮਾਰਦੇ ਆ ਲੋਡ ਅਨਸਾਰ ਹੀ ਕੱਪੜੇ ਨੂੰ ਛੋ ਵੀ ਉੱਪਰ ਟੱਕਦਾ ਨਾਂਕ ਸੱਚੇ ਨਾਂ ਬੇਨਾ ਚੁੱਕੇ ਕਾਲ ਐਵੇਂ ਨਾਮ ਸਾਡੇ ਫਿਰ ਦੇਦੇ ਸਾਤ ਮਾਰਦਾ ਲੋੜੇ ਫਰ ਮਾਰਦਾ ਨਾਮ ਦੀਆਂ ਸੱਟਾਂ ਚੋਟਾਂ ਦੇ ਬਿਨਾਂ ਕਾਲ ਨੇ ਸਿਰੋਂ ਨਹੀਂ ਚੁੱਕਣਾ ਜਮਨ ਬਲ ਨੇ ਗੜੋਂ ਨਹੀਂ ਲੈਣਾ ਪਾਣੀ ਚੋੜ ਜਰੂਰ ਮਾਰਦੀ ਹੈ ਪਰ ਮਨ ਸਾਫ਼ ਕਰਨ ਵਾਸਤੇ ਮਾਰਦੀ ਹੈ ਮਹੱਲਾ ਤੀਜਾ ਤ੍ਰਿਪਵਨ ਟੁੰਡੀ ਸੱਜਣਾ ਹੋਮੈ ਬੁਰੀ ਜਗਤ ਨਾ ਝੂਰ ਹੀੜੇ ਸੱਚ ਚੋ ਨਾਨਕ ਸੱਚੋ ਸੱਚ ਤ੍ਰਿਪਵਨ ਟੁੰਡੀ ਸੱਜਣਾ ਉਹ ਮੈਂ ਬੁਰੀ ਜਗਤ ਇਹ ਜਗਤ ਦੇ ਵਿੱਚ ਹੋ ਕੇ ਬੁਰੀ ਐ ਇੰਨੇ ਲੋਕਾਂ ਨੂੰ ਮੈਂ ਢੂੰਡ ਲਿਆ ਸਾਰਿਆਂ ਨੂੰ ਬੁਰੀ ਹੁੰਦੇ ਆ ਉਹ ਮੈਂ ਤਾਂ ਬੁਰਾ ਇੱਥੇ ਕੁਝ ਵੀ ਨਹੀਂ ਆਂ ਕਿ ਰਹੀਆੜੇ ਸੱਚਾ ਉਹ ਹਿਰਦੇ ਵਿੱਚ ਸੱਚਾ ਤੇਰੇ ਅੰਦਰ ਕਿਉਂ ਝੂਰਦਾ ਹੈ ਕਿਉਂ ਤੂੰ ਆ ਮੈਂ ਕਿਉਂ ਤੇਰੇ ਅੰਦਰ ਸੱਚ ਹੈਗਾ ਸੱਚ ਪ੍ਰਾਪਤ ਕਰ ਲੈ ਸੱਚ ਦਾ ਵਿਰੋਧ ਕਰਦੀ ਐ ਤੇਰੀ ਹੋਂਦ ਤੇਰੀ ਸੱਚ ਦਾ ਤੇਰੀ ਹੋ ਦੇ ਵਿਰੋਧ ਕਰਦੀ ਐ ਉਹ ਸੱਚ ਨੂੰ ਪ੍ਰਗਟ ਨਹੀਂ ਹੋ ਦਿੰਦੀ ਸੱਚ ਬੋਲਣ ਨਹੀਂ ਦਿੰਦੀ ਤੈਨੂੰ ਹੁਣੇ ਸਾਚੇ ਨੀਮਾ ਕਰਦਾ ਤਾਂ ਇਹਨੂੰ ਨੀਮਾ ਉਹਨਾ ਕੀ ਚਾਹਦਾ ਸੀ ਸੱਚ ਖਸਮਾ ਰਬਨਾ ਤਾਂ ਪਰ ਸਾਚ ਦਾ ਤੂੰ ਬਨੇ ਬੈਠਾ ਬਣਨਾ ਚਾਹੁੰਦਾ ਚਾਹ ਨਾਨਕ ਸੱਚਾ ਸੱਚ ਉਹ ਫੇਰ ਕਹਿੰਦੇ ਜੇ ਤੂੰ ਅੰਦਰੋਂ ਸੱਚ ਲਬ ਲਵੇਂ ਫੇਰ ਸੱਚੇ ਸੱਚਾ ਤੇਰੇ ਚਾਰ ਚੁਫੇਰੇ ਮਾਇਆ ਦਾ ਮੈਂ ਪਰਮਾ ਮਾਇਆ ਦਾ ਸੁਕਣੇ ਦਾ ਨਾ ਹਾਂ ਸੁਕਣੇ ਦੀ ਮਾਇਆ ਆ ਨਾਟੇ ਉਹਲੇੜੇ ਹਿਰਦੇ ਕਿਉਂ ਤੂੰ ਜੁੜਦਾ ਅੰਦਰ ਤੇਰਾ ਮੂਡ ਸੱਚਾ ਕੋਈ ਮਰਦਾ ਪਰ ਮੇਰਾ ਸਦਾ ਸਦਾ ਨਾ ਜਾਏ ਇਹ ਅਵਨਾਸੀ ਪੁਰਖ ਹੈ ਅਵਨਾਸੀ ਪੁਰਖ ਤੇਰੇ ਨਾਲ ਹੈ ਹੋ ਜਾ ਸੱਚ ਸੱਚੋ ਤੂੰ ਵੀ ਸੱਚਾ ਹੋ ਵੀ ਸੱਚ ਹੈ ਤੇ ਤੂੰ ਕਾਹ ਬੋਣਾ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਣ ਗੁਰ ਸ਼ਬਦ ਨਿਸ਼ਾਨੀ ਗੁਰਮੁਖ ਨੇ ਆਪੇ ਬਖਸ਼ੇ ਜਾਂਦੇ ਨੇ ਬਖਸ਼ੇ ਜਾਂਦੇ ਹਰ ਨਾਮ ਸੁਭਾਣੇ ਹਰ ਨਾਮ ਦੇ ਵਿੱਚ ਸਮਾ ਜਾਂਦੇ ਨੇ ਜਿਹੜੇ ਗੋਣ ਗੋਣ ਦੇ ਗੋਣ ਨੇ ਗੁਰਮੁਖ ਤੇ ਬਣ ਜਾਂਦੇ ਨੇ ਆਪਣੀ ਹਉਮੈ ਦਿੰਦੇ ਨੇ ਦਾਸ ਬਣ ਜਾਂਦੇ ਨੇ ਬਖਸ਼ੇ ਜਾਂਦੇ ਨੇ ਦਾਸ ਬਖਸ਼ੇ ਜਾਂਦੇ ਨੇ ਸਰਦਾਰ ਨਹੀਂ ਬਖਸ਼ੇ ਜਾਂਦੇ ਸਰਦਾਰ ਬਣ ਕੇ ਸਿੱਖ ਬਖਸ਼ੇ ਕਿੱਦਾਂ ਜਾਂਦੇ ਨੇ ਆਪੇ ਭਗਤੀ ਲਾਇਓਣ ਗੁਰ ਸ਼ਬਦ ਨਿਸ਼ਾਨ ਹੈ। ਅੱਫੇ ਭਰਤੀ ਲੱਜਦੇ ਜਾਂਦੇ ਨੇ। ਗੁਰ ਸ਼ਬਦ ਦੇ ਆਵਾਜ਼ੇ ਨਾਲ, ਕੋਈ ਸ਼ਬਦ ਨਾਲ ਨਿਸ਼ਾਨ ਆਵਾਜ਼ ਹੁੰਦੀ ਹੈ। ਗੁਰ ਸ਼ਬਦ ਗੁਰ ਸ਼ਬਦ ਨੂੰ ਸੁਣ ਕੇ ਭਰਤੀ ਲੱਗ ਜਾਂਦੇ ਨੇ। ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੇ। ਸਨਮੁਖ ਸਦਾ ਸੋਹਣੇ ਜਿਹੜੇ ਸਨਮੁਖ ਰਹਿੰਦੇ ਨੇ ਗੁਰਬਾਣੀ ਨੂੰ, ਗੁਰੂ ਨੂੰ। ਆਪਣੇ ਸਾਥ ਕੋਲ ਦੇ ਮੁਕਤੀਪੂਰੇ ਹਨ ਇਹਨਾਂ ਨੂੰ ਮੁੱਠੀ ਲੱਗਦੀ ਹੈ ਸਤਿ ਮੁਖ ਰਹਿਣ ਦੇ ਸੋਣ ਸੱਚੇ ਗਾਲ ਜਾਣੇ ਉਹ ਸੱਚੇ ਗਾਲ ਨੂੰ ਜਾਣਗੇ ਸੱਚੇ ਗਾਲ ਜਾਇ ਰਹਿਣ ਤੇ ਜਾ ਰਹੇ ਨੇ ਸੱਚੇ ਗਾਲ ਵੱਲੋਂ ਇੱਥੇ ਉੱਥੇ ਮੁਕਤ ਹੈ ਇੱਥੇ ਵੀ ਮੁਕਤ ਨੇ ਉੱਥੇ ਵੀ ਮੁਕਤ ਨੇ ਜਿਹਨਾਂ ਰਾਮ ਪਛਾਣ ਹੈ ਜਿਹਨਾਂ ਨੇ ਰਾਮ ਨੂੰ ਪਛਾਣ ਲਿਆ ਉਹ ਇੱਥੇ ਵੀ ਮੁਕਤ ਨੇ ਉੱਥੇ ਵੀ ਮੁਕਤ ਨੇ ਉਹ ਰਾਮ ਦੇ ਨਾਲ ਜੁੜਤੇ ਜਾ ਰਹੇ ਨੇ ਰਾਮ ਦੇ ਵਿੱਚ ਰੰਗਦੇ ਜਾ ਰਹੇ ਨੇ ਰਾਮ ਰੂਪ ਹੋ ਕੇ ਜਾ ਰਹੇ ਨੇ ਹਾਂਜੀ ਤਨ ਤਨ ਸੀ ਜਨ ਜਿਨ ਹਰ ਸੇਵਿਆ ਤਿੰਨ ਕੋ ਕੁਰਬਾਨੀ ਤਨ ਤਨ ਜਨ ਜਿਨ ਹਰ ਸੇਵਿਆ ਉਹ ਜਨ ਤੁਹਾਨੂੰ ਨੇ ਤਨ ਦੇ ਨੇ ਹਰ ਸੇਵਿਆ ਤਿੰਨ ਕੋ ਕੁਰਬਾਨੀ ਦੇ ਨਾਲ ਕੁਰਬਾਨ ਜਾਂਦੇ ਠੀਕ ਹੈ ਜੀ ਇੱਥੇ ਚੌਥੀ ਪੋੜੀ ਸੁਣਾਉਂਦੀ ਆ ਜੀ